ਧਰਮ ਸਤਕਾਰ ਜੋ ਸਤਿਗੁਰੂ ਰੂਪ ਸਾਧ ਸੰਗਤ ਜੀ ਅੱਜ ਆਪਾਂ ਸਭ ਮਿਲ ਕਰਕੇ ਅਕਾਲ ਪੁਰਖ ਪਤਿਤ ਪਾਵਨ ਪਰਮੇਸ਼ਰ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਸੰਗੀਤ ਧੁਨੀ ਦਾ ਆਨੰਦ ਮੰਨਣ ਵਾਸਤੇ ਸਭ ਇਕਜੁੱਟ ਹੋ ਕਰਕੇ ਇਕਮਨ ਹੋ ਕਰਕੇ ਉਸ ਪਰਬਤਗਰ ਕਰਨ ਕਾਦਰ ਸਤਿਗੁਰੂ ਜੀ ਨੂੰ ਯਾਦ ਕਰਨ ਵਾਸਤੇ ਆਏ ਹਾਂ। ਵਾਸਤਵ ਵਿੱਚ ਸੰਗੀਤ ਸਮੇਲਨ ਕੋਈ ਮੇਲਾ ਨਹੀਂ ਹੁੰਦਾ। ਸੰਗੀਤ ਸਮੇਲਨ ਕੋਈ ਰਾਸ਼ਵਾਲੀ ਜਗ੍ਹਾ ਨਹੀਂ ਹੁੰਦੀ। ਜਾਂ ਕੋਈ এনਜਾਇਰਮੈਂਟ ਦਾ ਸਾਧਨ ਨਹੀਂ ਹੁੰਦਾ ਇਹ ਕੇਵਲ ਤੇ ਕੇਵਲ ਪਰਮਦਰਕਰਨ ਕਾਦਰ ਸਤਗੁਰੂ ਦੀ ਉਸਤਤੀ ਹੁੰਦੀ ਹੈ ਉਸਤਤੀ ਤੋਂ ਬਗੈਰ ਈਸ਼ਵਰ ਦੀ ਬੰਦਗੀ ਤੋਂ ਬਗੈਰ ਸੰਗੀਤ ਕਿਸੇ ਕੰਮ ਦਾ ਨਹੀਂ ਹੈ ਜੋ ਜੀਵ ਦੁਨੀਆ ਨੂੰ ਖੁਸ਼ ਕਰਨ ਵਾਸਤੇ ਗਾਉਂਦਾ ਹੈ ਅਧੂਰਾ ਰਹਿ ਜਾਂਦਾ ਪਹੁੰਚ ਨਹੀਂ ਸਕਦਾ ਔਰ ਜੋ ਸੰਗੀਤ ਦੁਨਿਆਵੀ ਪਦਾਰਥਾਂ ਲਈ ਦੁਨਿਆਵੀ ਅਨਜਾਇਮੈਂਟ ਲਈ ਕਰਦਾ ਉਹ ਵੀ ਅਧੂਰਾ ਰਹਿ ਜਾਂਦਾ ਹੈ ਆਪਾਂ ਨੂੰ ਸਾਰਿਆਂ ਨੂੰ ਈਸ਼ਵਰ ਨੇ ਸਤਗੁਰੂ ਜੀ ਨੇ ਸੰਗੀਤ ਦਾ ਬਹੁਤ ਵੱਡਾ ਖਜ਼ਾਨਾ ਬਖਸ਼ਿਸ਼ ਕੀਤਾ ਹੈ ਨਾਮਧਾਰੀ ਸੰਸਥਾ ਨਾਮਧਾਰੀ ਸੰਸਥਾ ਦੇ ਮੋਢੀ ਸਤਿਗੁਰੂ ਰਾਮ ਸਿੰਘ ਜੀ ਔਰ ਮੌਜੂਦਾ ਸਤਿਗੁਰੂ ਜਗਜੀਤ ਸਿੰਘ ਜੀ ਬਹੁਤ ਯੋਗਦਾਨ ਜੀਵਾਂ ਨੂੰ ਸਧਾਰਨ ਵਾਸਤੇ ਜੀਵਾਂ ਨੂੰ ਸੰਗੀਤ ਨਾਲ ਜੋੜਨ ਵਾਸਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਯੋਗਦਾਨ ਕਰ ਰਹੇ ਨੇ ਪਾ ਰਹੇ ਨੇ ਅ ਸਰਜੀਤ ਸਿੰਘ ਜੀ ਕਿਰਨਪਾਲ ਸਿੰਘ ਜੀ ਉਸਤਾਦ ਹਰਭਜਨ ਸਿੰਘ ਜੀ ਇਹ ਸਭ ਉਹਨਾਂ ਮਹਾਪੁਰਸ਼ਾਂ ਦੇ ਬਗੀਚੇ ਵਿੱਚੋਂ ਮਹਿਕਦੇ ਹੋਏ ਫੁੱਲ ਨੇ ਔਰ ਮੈਂ ਸੋਚਦਾ ਜਦੋਂ ਇਹ ਸਮਾਂ ਅਸੀਂ ਵਿਅਰਥ ਗਵਾਲੀ ਦਾ ਔਰ ਸ਼ਾਇਦ ਇਹਨਾਂ ਬੱਚਿਆਂ ਤੇ ਇਹਨਾਂ ਲੋਕਾਂ ਤੇ ਸਰਜੀਤ ਸਿੰਘ ਜੀ ਕਰਮਪਾਲ ਸਿੰਘ ਜੀ ਸੁਖਵਿੰਦਰ ਸਿੰਘ ਪੈਂਕੀ ਇਹਨਾਂ ਤੇ ਜਿੰਨੀ ਮਹਾਪੁਰਸ਼ਾਂ ਦੀ ਬਖਸ਼ਿਸ਼ ਹੈ ਉੰਨੀ ਆਮ ਕਿਸੇ ਤੇ ਬਖਸ਼ਿਸ਼ ਨਹੀਂ ਹੈ ਮੈਂ ਬਹੁਤ ਧੀਰ ਤੋਂ ਜਾਣਦਾ ਸੰਗੀਤ ਸਮੇਲਨ ਦਾ ਭਾਵ ਮਹਾਪੁਰਸ਼ਾਂ ਦੀ ਉਸਤਤੀ ਗੁਰੂ ਚਰਨਾਂ ਦਾ ਪਿਆਰ ਔਰ ਥੋੜਾ ਜੀਵਨ ਨੂੰ ਸੰਕੂਨ ਦੇਣ ਵਾਸਤੇ ਹੁੰਦਾ ਲੜਾਈ ਝਗੜੇ ਵਾਸਤੇ ਖਿੱਚੋ ਤਾਣ ਵਾਸਤੇ એનર્ਜੀ ਬੇਸਡ ਕਰਨ ਵਾਸਤੇ ਨਹੀਂ ਹੁੰਦਾ ਮੈਨੂੰ ਪਤਾ ਤੁਸੀਂ ਬਹੁਤ ਗੁਣੀ ਲੋਗ ਹੋ ਸੰਗੀਤ ਦਾ ਕੰਮ ਹੁੰਦਾ ਮਿਲਤ ਦਾ ਪਿਆਰ ਦਾ ਮਿਲਤ ਨਾਲ ਪਿਆਰ ਦੇ ਨਾਲ ਦੋਸਤ ਵਰ ਵੀ ਜਾਣ ਬਹੁਤ ਹੀ ਲਾਭਦਾਇਕ ਹੁੰਦੇ ਨੇ ਮੈਂ ਕੁਝ ਸਮੇਂ ਬਾਸਤੇ ਕਿਉਂਕਿ ਮੇਰਾ ਥੋੜਾ ਸਮਾਂ ਤਾਂ ਤਬਲੇ ਦੀ ਕੰਪਨੀ ਕਰਨ ਵਾਸਤੇ ਲੱਭਣ ਵਾਸਤੇ ਬੀਤ ਗਿਆ ਕੁਝ ਸਮਾਂ ਹਾਰਮੋਨੀਅਮ ਨੂੰ ਸੁਰ ਕਨ ਵਾਸਤੇ ਬਦਲਣ ਵਾਸਤੇ ਬੀਤ ਗਿਆ ਔਰ ਕੁਝ ਸਮਾਂ ਆਪ ਜੀ ਨੂੰ ਜੋਣ ਵਾਸਤੇ ਬੀਤ ਗਿਆ ਇੱਕ ਮੈਂ ਸ਼ੇਰ ਕਹਿ ਕੇ ਆਪ ਜਿੱਤੋਂ ਅੱਗੇ ਵਧਾਂਗਾ ਕੁਝ ਗਮ ਕੁਝ ਰੰਜਿਸ਼ ਕੁਝ ਆਂਹੋਂ ਮੇਂ ਕੱਟ ਗਈ ਬਾਕੀ ਜੋ बची बुगनाहों में कट गई एक ਪੇ पे ਵਾਲੇ वाले ਕੋ को पा गए राह बदलने वालों की राहों में कट गई आओ मैं आप जी दे समक्ष राग मालकौस थोड़े समय ले गा के आप जी तो क्षमा मंगांगा और मैं अपने इर्द-गिर्द बैठे विद्वान लोगां तो आप जी विद्वान लोगां तो आज्ञा च मांगंगा आज्ञा बख्शिश